ਖਾਪਿਆ ਨਾ ਜਾਏ ਕੀਤਾ ਨਾ ਹੋ ਜਦ ਹੋਰ ਪਰਸ਼ਨ ਕੀਤੇ ਇਹ ਪਰਮੇਸ਼ਰ ਮਾਰਾ ਨਾਦੀ ਹੈ ਕਿ ਬਿੰਦੀ ਹੈ ਅਤੇ ਸੱਚੇ ਕਾਰਜਾ ਹੀ ਕੋ ਦੱਸੋ ਆਪ ਕਰਤਾ ਕਰਕੇ ਕਿ ਸੇਵਕ ਬਣੇ ਉਹ ਨਾਦੀ ਉਲਾਦ ਹੁੰਦੀ ਹੈ ਬਿੰਦੀ ਜੋ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੋਵੇ ਉਹ ਬਿੰਦੀ ਉਲਾਦ ਹੁੰਦੀ ਹੈ ਜੇ ਉਹ ਪਰਮੇਸ਼ਰ ਸਤੰਤਰ ਹੈ ਕਿ ਪਤੰਤਰ ਹੈ ਕਿ ਉਹ ਮਾਰਾ ਮਾਇਆ ਮਹਿਲ ਹੈ ਤਾਂ ਹੈ ਕਿ ਬਈ ਇਹ ਪਰਸ਼ਨ ਹਨ ਇਹ ਕਿੰਨ ਪਰਸ਼ਨਾਂ ਉੱਪਰ ਹਜ਼ੂਰ ਫਰਮਾਉਂਦੇ ਹਨ ਫਾਤਿਆ ਨਾ ਜਾਏ ਕੀਤਾ ਨਾ ਹੋ ਇਸ ਲੋਕ ਜਿਸ ਸਰਕਾਰ ਕਿਸੇ ਨੂੰ ਥੇਲੇ ਨੂੰ ਗੱਡੀ ਤੇ ਫਾਦ ਨਾ ਉਹਨਾਂ ਦੇ ਮੁਰਸ਼ਿਦ ਇਸ ਸਰਕਾਰ ਉਹ ਪਰਮੇਸ਼ਰ ਦਾ ਫਾਤਿਆ ਹੋਇਆ ਨਹੀਂ ਫਾਤਿਆ ਜਾਂਦਾ ਇਸ ਕਰਕੇ ਮਾਦੀ ਇਲਾਜ ਨਹੀਂ ਕੋਈ ਥੇਲਾ ਬਣ ਕੇ ਕਿਸੇ ਨੂੰ ਗੱਡੀ ਤੇ ਪਰਮੇਸ਼ਰ ਨੂੰ ਜਿਹੜੇ ਲੋਕ ਕਹਿੰਦੇ ਆ ਕਿ ਕੋਈ ਵੱਡਾ ਆਦਮੀ ਹੋਣਾ ਉਨਨ ਨੇ ਕੰਮ ਯਾਦ ਰਾਬੂ ਕਰਕੇ ਥਾਕਦਾ ਨਾਸਕ ਲੋਕ ਕਹਿੰਦੇ ਖਿਆਲ ਹੈ ਨਾ ਚਾਰ ਵਾਕੀਆਂ ਦੇ ਕੋਈ ਨਾ ਮਾਰਾ ਸੱਚ ਤੇ ਗੱਦੀ ਮਸ਼ੀਨ ਬਣਾ ਬਿੰਦੀ ਇਲਾਜ ਕਰਕੇ ਉਹ ਪੈਦਾ ਨਹੀਂ ਕੀਤਾ ਹੋਇਆ ਨਾ ਕਿਸ ਬਾਪ ਨੇ ਜਾਇਆ ਕਹਿੰਦੇ ਪਤੰਤਰ ਨਹੀਂ ਆਪੇ ਆਪ ਹੈ ਆਪਣਾ ਆਪ ਹੀ ਦੇਵਹੀ ਹੈ ਉਹ ਪਰਮੇਸ਼ਰ ਸੁਤੰਤਰ ਹੈ। ਜਿਨ ਕੇ ਹੋ ਨਿਰੰਜਨ ਸੋ ਉਹ ਮਾਰਾ ਤਵੇ ਇਸ ਪ੍ਰਕਾਰ ਮਾਇਆ ਮਾਲਕ ਹੈ ਤੋ ਹੁਣ ਕਹਿੰਦੇ ਨਾ ਨਿਰੰਜਨ ਖੁਦ ਹੈ ਮਾਇਆ ਵੀ ਮੈ ਤੇ ਨਿਰੰਜਨ ਮਾਇਆ ਕਾਸ ਤੇ ਰਹੇ ਤੋ ਕਰਕੇ ਉਹ ਸੁਭਿਆ ਪਰਸਾਂ ਦੇ ਉੱਪਰ ਆ ਗਏ ਸਰਕਾਰ ਜਿਨ ਸੇਵਿਆ ਤਿਨ ਕਾਇਆ ਮਾਨ ਸਿਰ ਮਹਾਰਾਜ ਉਸ ਜਿਲਕਾਰ ਇਹਨਾਂ ਕੋਈ ਵੱਡੇ ਪ੍ਰਖਿਣ ਕਿਸੇ ਨੇ ਸਥਾਪਨ ਕੀਤਾ ਹੋਵੇ ਇਸ ਤਰ੍ਹਾਂ ਹੁਣ ਪਰ ਮਾਰੇ ਕਹਿੰਦੇ ਉਹ ਨਹੀਂ ਆਪੇ ਆਪ ਹੈ ਪਰਮੇਸ਼ਰ ਨੂੰ ਨੂੰ ਸਭ ਸ਼੍ਰੀ ਹੈ ਉਹ ਜਿਨ ਸੇਵਾ ਤਿਨ ਕਾਇ ਮਾਨ ਜਿਨ ਨੇ ਸੁਧੋ ਹਿਰਨੇ ਸੇਵਨ ਕੀਤਾ ਧਰਮ ਕੀਤਾ ਹੈ ਉਹਨਾਂ ਨੇ ਇਹ ਕਰਕੇ ਮਾਂ ਸਤਕਾਰ ਪਾਉਣੇ ਕੀਤਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਕਾਰਤ ਕੀ ਹੋਈ ਹੈ ਇਹ ਨਾ ਕੋਈ ਸਕਾਰ ਪਾਇਆ ਹੈ ਨਾਨਕ ਗਾ ਰਿਹਾ ਗੁਣੀ ਲਗਾ ਸਭ ਸਾਕ ਨੂੰ ਪਰਮੇਸ਼ਰ ਨੂੰ ਗਾਉਣਾ ਚਾਹੀਏ ਜਾਈਏ ਜੇ ਗਾਉਣਾ ਵੀ ਕਰੀਏ ਫਿਰ ਆਪਣਾ ਸਰਵਨਾ ਸੁਣੀਏ ਵੀ ਕੰਨ ਦੇ ਨਾਲ ਫਿਰ ਸੁਣ ਕਰਕੇ ਮਨ ਮਨ ਵਿੱਚ ਮੰਨ ਵੀ ਕਰੀਏ ਤੇ ਰੱਖੀਏ ਕਮਾਈ ਵੀ ਕਰੀਏ ਜੇ ਤਾ ਆਤਮ ਪ੍ਰਕਾਸ਼ ਹੁੰਦਾ ਹੈ ਉਹਦਾ ਜਦੋਂ ਗਾਉਂਦੇ ਹੋ ਵੀ ਮਨ ਚ ਪ੍ਰੇਮ ਰੱਖੀਏ ਜਦੋਂ ਸੁਣੀਏ ਹੋਵੇ ਮਨ ਚ ਪ੍ਰੇਮ ਰੱਖੀਏ ਫਿਰ ਸਾਰ ਸੰਗੀਏ ਉਸ ਨੂੰ ਇਹ ਪ੍ਰਕਾਸ਼ ਹੁੰਦਾ ਹੈ ਦੁੱਖ ਘਰ ਲੈ ਜਾ ਕਰ ਦਿੰਦਾ ਦੂਰ ਕਰ ਦਿੰਦਾ ਤੇ ਸੁਖ ਨੂੰ ਲੈ ਕੇ ਪ੍ਰਲੋਕ ਉਸੇ ਘਰ ਜੀਵ ਜਾਂਦਾ ਹੈ ਦੁੱਖ ਨਹੀਂ ਕੋਈ ਇਹਨੇ ਸਾਰੇ ਦੁੱਖ ਤਿਆਰ ਜਾਂਦਾ ਦੂਰ ਹੋ ਜਾਂਦੇ ਆ ਸੋਹਰੂ ਘਰ ਤੋਂ ਲੈ ਕੇ ਪ੍ਰਲੋਕੀ ਜਾਂਦਾ ਹੈ ਕੁੱਝ ਦੇ ਸਤ ਗੁਰਮੁਖ ਲਾ ਗਈ ਗੁਰਮੁਖ ਵੇਦੰ ਇਨਹਾਰਾ ਜੀ ਜਿਹੜੇ ਯਾਰ ਸਬਦ ਇਹਨਾਂ ਰਾਹ ਸਾਹਿਬ ਦੇ ਗੁਰੂ ਸਾਹਿਬ ਦੇ ਮੁਖੀ ਤੋਂ ਆਰ ਸਬਦ ਦੇ ਸੁਣਨਾ ਕਰੇ ਇਨਹਾਰਾ ਦੇ ਉਪਦੇਸ਼ ਤੋਂ ਬੇਅਦੀ ਬਿੰਦਾ ਹੈ ਆਮਾਰਾ ਕਹਿੰਦੇ ਗੁਰਮੁਖ ਵੇਦ ਨੂੰ ਗੁਰੂ ਸਾਹਿਬ ਦੇ ਮੁਖ ਵਿੱਚ ਸਾਰੇ ਵੇਦ ਹਨ ਗੁਰਮੁਖ ਰਹਿ ਆਤਮਾਈ ਉਹ ਤਾਂ ਮਹਾਰਾਜ ਦੀ ਸ਼ੇ ਵੇ ਮੁਖੀ ਕਿਉਂ ਕਹਿੰਦੇ ਵੇਦ ਨਿਕਲੇ ਹੈ ਮੁਹੀ ਦੇ ਉਹ ਗੁਰਾਂ ਦੇ ਰਿਹਾ ਸਮਾਏ ਉਹਨਾਂ ਦੇ ਵਿੱਚ ਅਭੇਦ ਹੋ ਰਿਹਾ ਹੈ ਗੁਰ ਈਸ਼ਰ ਗੁਰ ਗੋੜਖ ਬਰਮ ਗੁਰਪਰਮੇਸ਼ਰ ਜੀ ਕੈਸਾ ਹੈ ਕਹਿੰਦੇ ਗੁਰ ਈਸ਼ਰ ਈਸ਼ਰ ਸ਼ਿਵ ਜੀ ਦਾ ਵੀ ਉਹ ਗੁਰੂ ਹੈ ਅਤੇ ਗੋਰਖ ਬਿਸ਼ਨੂ ਦੇ ਤ੍ਰਿਸ਼ੀ ਰਖਾ ਕਰਨੇ ਉਸ ਦਾ ਵੀ ਗੁਰੂ ਹੈ ਬਰਮਾ ਗੁਰ ਅਤੇ ਬ੍ਰਹਮਾ ਜੀ ਦਾ ਵੀ ਗੁਰੂ ਹੈ ਪਰਮੇਸ਼ਰ ਸਾਰਬਤੀ ਮਾਈ ਸਾਰਬਤੀ ਸ਼ਕਤੀ ਹੈ ਜਿਸ ਬ੍ਰਹਮਾ ਦੀ ਇਹਨਾਂ ਸਾਰੀਆਂ ਸ਼ਕਤੀਆਂ ਦੇ ਵਾਲੇ ਦੇਖਿਆਂ ਲੋ ਗੁਰੂ ਹੈ ਸਾਰਿਆਂ ਦਾ ਗੁਰੂ ਰਾਮਾ ਗੁਰੂ ਵਿਸ਼ਨੂ ਗੁਰੂ ਦੇ ਮਹੇਸ਼ਰ ਗੁਰੂ ਸਾਚਾਦ ਕਰਮਨ ਕਸ ਮਈਸ਼ੀ ਗੁਰੂ ਵੇਨੂ ਉਹ ਜੀ ਦੇ ਤਾਂ ਸਾਡੀ ਨੰਸਤਾਰ ਜਿਹੜਾ ਇਹਨਾਂ ਸਾਰਿਆਂ ਦਾ ਹੀ ਗੁਰੂ ਹੈ ਇਹ ਹੋ ਜਾਣਾ ਆਖਾ ਨਹੀਂ ਇਹ ਸੰਗ੍ਰਹਿ ਕਿਰਪਾ ਕਰਕੇ ਆਪੋ ਦੱਸਿਓ ਉਸ ਗੁਰੂ ਦਾ ਹੋਰ ਲਖਣ ਮਹਾਰਾ ਕਹਿੰਦੇ ਜੇ ਅਨੁਭਵ ਵਾਲਾ ਜਾਣਦੇ ਹਾਂ ਤਾਂ ਫੇਰ ਕਹਿੰਦੇ ਨਹੀਂ ਆਖਦੇ ਨਹੀਂ ਹਾਂ ਕਹਿਣਾ ਕਥਨ ਨਾ ਜਾਈ ਇਹ ਕਰਕੇ ਕਿਹਾ ਨਹੀਂ ਜਾ ਸਕਦਾ ਉਸ ਵਾਹਿਗੁਰੂ ਦਾ ਰੂਪ ਰੰਗ ਆਦਿਕੋ ਮੁਰਾ ਇੱਕ ਦੇਹ ਦੇਹ ਦਿਓ ਸਾਹ ਮਾਰੇ ਕੰਨਿ ਗੋਨਾ ਗੁਰੂ ਨੇ ਗੁਰਾ ਬੀਐਨਪੀ ਕੀਤੀ ਗੁਰਪਰਮੇਸ਼ਰ ਇਹ ਕਾਗ ਦੀ ਬੁਝਾਈ ਸਿੱਖਿਆ ਦੇਣਾ ਕਰੋ ਸਾਨੂੰ ਸਭਨਾ ਜੀਆ ਦਾ ਇੱਕ ਦਾਤਾ ਇਹ ਕੋਈ ਦਾਤਾ ਹੋ ਮੈਂ ਵਿਸਰਨਾ ਜਾਵਾਂ ਸਾਨੂੰ ਕਦੇ ਭੁੱਲ ਨਾ ਜਾਵੇ ਸਿੱਧੋ ਇਹ ਮਹਾਰਾਜ ਸਾਡੀ ਸਿੱਧਾ ਦੇ ਨਾਲ ਪਰਸ਼ਨੀ ਉਤਰ ਕਰਕੇ ਇਸ ਪ੍ਰਕਾਰ ਬਚਨ ਕੀਤੇ ਹਨ ਪੰਨੀ ਕੌੜੀ ਦੇ ਵਿੱਚ ਇਸੇ ਪ੍ਰਕਾਰ ये सिखण में एंट्री कीती गुरु साहिब अग्गे तब गुरु साहिब कर दी जाने आपया न जाए किसका न हो ये सिखो परमेश्वर कैसे खापया न जाए किसे वो ध्यान दा विषय करके कि ये क्यों मुंहवा रहा है ब्रह्मा है या विष्णु जी ਜੋ ਜਨ ਗਿਆਨ ਗਿਆਨ ਮੰਨਿਆ ਆਇਆ ਕਿ ਧਿਆਨ ਕੀ ਗਿਆਤ ਹੈ ਉਹ ਇਹ ਰੇਖ ਰੰਗ ਨਾ ਰੂਪ ਸੋ ਜਾਨੀਏ ਸਮਰੂਪ ਉਸ ਮਾਇਆ ਹੋਇਆ ਸਾਰੇ ਜਗ ਕੋਈ ਮੂਰਤੀ ਨਾਨ ਪਜਾਰਥ ਨਹੀਂ ਕਾਜੀ ਮੂਰਤੀ ਜਾਂ ਲੋਹੇ ਦੀ ਮੂਰਤੀ ਜਾਂ ਪੱਥਰ ਦੀ ਮੂਰਤੀ ਜਾਂ ਕਿਸੇ ਪ੍ਰਕਾਰ ਦੀ ਉਤਰੀ ਹੋਈ ਮੂਰਤੀ ਕਿਸੇ ਪ੍ਰਕਾਰ ਦੀ ਉਹ ਖਾਤਿਆ ਕਿਸੇ ਦਾ ਉਹ ਖਾਪੇ ਨਹੀਂ ਜਾ ਸਕਦਾ ਕੀਤਾ ਨਾ ਹੋਏ ਉਹ ਕਿਸੇ ਦਾ ਉਹ ਕੀਤਾ ਹੋਇਆ ਸਾਵਧਨ ਕਰਕੇ ਉਹ ਸੱਚਾ ਨਹੀਂ ਹੋ ਸਕਦਾ ਕੀਤਾ ਕੋਈ ਨਹੀਂ ਹੈ ਉਹ ਅਗਰ ਉਹ ਕਿਸੇ ਪ੍ਰਕਾਰ ਹਨ ਕੀਤਾ ਹੋਇਆ ਕਿਸੇ ਦੇ ਪਾਸ ਹੋ ਨਹੀਂ ਸਕਦਾ ਹੈ ਆਪੇ ਆਪ ਨਰੰਜਨ ਤੋਂ ਪ੍ਰਾਪਤੀ ਆਪੇ ਆਪਣਾ ਆਪ ਨੂੰ ਸਾਰਿਆਂ ਦਾ ਪ੍ਰਾਪਤੂਤ ਹੈ ਆਪੇ ਸਾਰਿਆਂ ਦੇ ਅੰਤਾਂ ਕਰਨ ਦਾ ਸਾਖੀ ਰੂਪ ਹੋ ਕੇ বিরাজਮਾਨ ਹੋ ਰਿਹਾ ਹੈ ਆਪ ਹੀ ਸੱਚੇ ਦਾ ਸਾਰਿਆਂ ਦੇ ਅੰਦਰ ਅਗਿਆਕ ਆਨੰਦ ਰੂਪ ਹੋ ਕੇ বিরাজ ਰਿਹਾ ਹੈ ਜੀ ਜੀ ਹੋਏ ਤੇ ਇਹ ਆਪਣਾ ਰੂਪ ਆਪਣਾ ਆਪ ਰੂਪ ਹੈ ਨਿਰੰਗ ਮਾਇਆ ਕਾਲ ਕਰੂ ਕੀ ਅੰਨਿਮ ਚੁਰਮੇ ਤੋ ਹੈ ਸੋ ਅਖੁਦ ਸ੍ਰੀ ਹੈ ਪਰਮੇਸ਼ਵਰ येन सेवा तिन पाया मानो जिनने सेवान की दौ चिंतन कीत है तिन सीखा है कोटि लाख जात काब लोग कोटि लाख पूजा हर समय करने लायो करोड़ों जात करले करोड़ों तात करले लाखों पूजा करले मारे तो स्मरण दे कोई नहीं कोई की ਜਿਸ ਦਰਕਾਰ ਜਿਨ੍ਹਾਂ ਨੇ ਉਹਦਾ ਕੀਤਾ ਛੇ ਲਿਆ ਹੈ ਤਿੰਨ ਪਾਇਆ ਮਾਨ ਇਹਨਾਂ ਵਸਰ ਵਿੱਚ ਜੀ ਕਾਹੋ ਮਾਨ ਸਤਕਾਰ ਪਾਇਆ ਹੈ ਉਹਨਾਂ ਨੇ ਉਹਦੇ ਮਾਨ ਮੰਨਣ ਨੂੰ ਪਾਇਆ ਹੈ ਮਾਨ ਜੋ ਖੜ ਦੇ ਨਾ ਹੀ ਖੜ ਵਾਲੇ ਜਿਹੜੇ ਹਨ ਪ੍ਰਕਾਸ਼ ਪਰਮਾਨ ਕਰਕੇ ਜਿਹੜੇ ਕਾਰਵਾਸੀਏ ਲੋਕ ਹੈ ਇਹ ਪ੍ਰਕਾਸ਼ ਪਰਮਾਨ ਨਹੀਂ ਮੰਨਦੇ ਹਨਗੇ ਜੋ ਕੋਈ ਦਿਖ ਰਿਹਾ ਹੈ ਉਹ ਹੈ ਇਹ ਪ੍ਰਕਾਸ਼ ਪਰਮਾਨ ਕਰਕੇ ਇਸੇ ਪ੍ਰਕਾਰ ਜਿਹੜਾ ਹਰ ਜਿਸ ਕਰਕੇ ਸਾਰਿਆਂ ਦਾ ਗਿਆਨ ਹੁੰਦਾ ਹੈ ਉਹ ਕੇਥੇ ਪ੍ਰਕਾਸ਼ ਰੂਪ ਹੈ ਇਸ ਪ੍ਰਕਾਰ ਪ੍ਰਕਾਸ਼ ਕੋ ਮਾਨ ਦੁਆਰਾ ਵਿਵਿੱਖੱਖ ਦੁਆਰਾ ਤੇ ਅਨੁਮਾਨ ਪ੍ਰਮਾਨ ਧੂੰਆਂ ਨਿਕਲ ਜਿੱਥੇ ਧੂੰਆਂ ਨਿਕਲਦਾ ਉੱਥੇ ਅਗਨੀ ਹੁੰਦੀ ਹੈ ਜਿਵੇਂ ਸਾਡੀ ਹੋਈ ਜੇ ਧੂੰਆਂ ਨਿਕਲਦਾ ਉਹ ਅੱਗ ਹੁੰਦੀ ਹੈ ਇਸੇ ਪ੍ਰਕਾਰ ਅਨੁਮਾਨ ਦਿਆਰੇ ਜਿਨੇ ਜਗਤ ਨੂੰ ਪਹਿਦਾ ਕੀਤਾ ਹੈ ਇਹ ਜਗ ਜਿਸ ਦਾ ਕਾਰਜ ਹੈ ਉਹ ਕੋਈ ਪਰਮੇਸ਼ਰ ਹੈ ਇਹ ਅਨੁਮਾਨ ਦੁਆਰਾ ਜਿਨੀ ਪੱਖ ਦੁਆਰਾ ਉਪਮਾ ਉਪਮਾ ਜਿਨੀ ਆਕਾਸ਼ ਵਿਆਪਕ ਹੈ ਐ ਉਪਮਾਨ ਕਰਵਾਉਣ ਜਾ ਰਹਾ ਇਸੇ ਤਰ੍ਹਾਂ ਇਸੇ ਪ੍ਰਕਾਰ ਉਪਮਾ ਦੇ ਕਰਕੇ ਜਿਨੀ ਕਿਸੇ ਨੇ ਰੋਜ ਨਹੀਂ ਦੇਖਿਆ ਉਸ ਦੇ ਕਿਸੇ ਦੱਸਣ ਵਾਲੇ ਦੱਸਿਆ ਕਿ ਦਵੇ ਵੀ ਨਹੀਂ ਰੋਜ ਹੁੰਦਾ ਇਸੇ ਪ੍ਰਕਾਰ ਜਗ ਰੋਹ ਹੁੰਦੀ ਹੈ ਉਸ ਦਾ ਇਹ ਰੋਜ ਹੁੰਦਾ ਹੈ ਦੇ ਦੂਰੇ ਗਾਇਲ ਤੋਂ ਹੁੰਦਾ ਹੋਇਤ ਨਿਕੋ ਬਗਾਇਰ ਹੁੰਦਾ ਹੈ ਘੋੜੀ ਨਹੀਂ ਆਈ ਉਹਦਾ ਗਾਇ ਹੁੰਦਾ ਹੈ ਇਸ ਪ੍ਰਕਾਰ ਦੇ ਨਮੂਨੇ ਦੇ ਨਾਲ ਜਿਹੜਾ ਉਪਮਾ ਦੁਆਰਾ ਕੋਈ ਚੀਜ਼ ਨੂੰ ਸੰਸ਼ਈ ਉਪਮਾਨ ਪ੍ਰਮਾਣ ਹੋਏ ਇਸ ਤੋਂ ਕਿ ਆਕਾਸ਼ ਹੈ ਤਾਂ ਜੜ ਪਰ ਵਿਆਪਕ ਹੈ ਵਿਆਪਕ ਨੂੰ ਵੀ ਕੰਸ ਕਰਕੇ ਉਸ ਸਮਝਣਾ ਉਮਾਨ ਪ੍ਰਮਾਣ ਹੈ ਇਸੇ ਪ੍ਰਕਾਰ ਤਬਿਲ ਪ੍ਰਮਾਣ ਕਿਸੇ ਜ਼ਕਾਰਦ ਵਜੋਂ ਕਹੇ ਕਿ ਤੁਹਾਡਾ ਮੁੰਡਾ ਸੂਬੇਦਾਰ ਹੋ ਗਿਆ ਉਹ ਨਹੀਂ ਕਿਹਾ ਉਹ ਕਿ ਮੇਰਾ ਪੁੱਤਰ ਨੌਕਰੀ ਕਰਦਾ ਹੈ ਸੂਬੇਦਾਰ ਹੋ ਗਿਆ ਕਿਉਂ ਜਾਣ ਲੈਣਾ ਜਿਹੜਾ ਜ਼ਖਾਰ ਤੋਂ ਵੱਧ ਪੁਰਸ਼ ਨੇ ਨਾ ਹੰਦ ਲੈਣਾ ਇਸ ਪ੍ਰਕਾਰ ਸ਼ਬਦ ਪ੍ਰਮਾਣ ਹੈ ਗੁਰਾਂ ਦੇ ਵਾਕ ਦੁਆਰਾ ਉਸ ਪਰਮੇਸ਼ਰ ਦਾ ਨਿਸ਼ਚੈ ਕਰ ਲੈਣਾ ਸ਼ਬਦ ਪ੍ਰਮਾਣ ਹੈ ਇਸੇ ਪ੍ਰਕਾਰ ਸਾ ਸੰਗ ਦੀ ਅਰਥਾਕੀ ਪ੍ਰਮਾਣ ਹੈ ਅਰਥ ਕਰਕੇ ਪਹਿਲਾ ਜਿਵੇਂ ਤਾਂ ਕੋਈ ਭੋਜਨ ਖਾਂਦਾ ਨਹੀਂ ਹੈ ਉਹ ਭੋਜਨ ਜੁੱਤ ਖਾਂਦਾ ਹੈ ਉਹਦਾ ਸਰੀਰ ਬੜਾ ਸਖੂਲ ਹੈ ਸਖੂਲ ਸਰੀਰ ਨੂੰ ਵੇਖ ਕੇ ਕਹਿੰਦੇ ਉਹ ਭੋਜਨ ਨਹੀਂ ਖਾਂਦਾ ਜਿਵੇਂ ਇਹਦੇ ਜੇਰੀ ਖਾਂਦਾ ਹੁਣੇ ਜੇਰੀ ਖਾਣ ਦੇ ਬਿਨਾਂ ਹੀ ਨਿਰਵਾਣ ਨਹੀਂ ਹੋ ਸਕਦਾ ਇਸ ਕਰਕੇ ਖਰਾਕੇ ਵੀ ਹੈ ਪਰ ਲੋਕ ਨੂੰ ਖਰਾਕ ਹੈ ਇਹ ਹੋ ਰਿਹਾ ਨਾਲ ਹਰਕਤ ਹੋ ਰਹੀ ਹੈ ਉਹ ਕੋਈ ਚੇਤਨ ਹੈ ਇਹ ਅਰਥਾਤ ਕਰਕੇ ਸਮਝਣਾ ਹੈ ਅਨੁਗਲਗ ਵੀ ਪਰਮਾਨੰ ਇਸ ਪ੍ਰਕਾਰ ਕਿਸੇ ਪੁਰਖ ਨੇ ਕਿਹਾ ਹੈ ਕਿ ਸੌਂਦੇ ਵਿੱਚ ਦੇਵਕਾਰ ਨੇ ਇਸ ਦੇ ਵਿੱਚ ਇਸ ਪ੍ਰਕਾਰ ਪ੍ਰਮਾਨ ਦੁਆਰਾ ਇਹ ਜਿਹੜਾ ਸਾਰੇ ਵੇਦ ਸ਼ਾਸਤਰ ਵਿੱਚ ਕੋਈ ਵੇਸੇ ਦਾ ਨਹੀਂ ਕਹਿੰਦੇ ਆ ਇਹਨੂੰ ਆਈ ਕੋਈ ਜੇ ਜਿਨ ਨੂੰ ਕੋਈ ਨਹੀਂ ਲਿਆ ਮਨ ਨਹੀਂ ਪਾਇਆ ਹੈ ਕੌਣ ਗੁਨਾ ਦੇ ਖਜ਼ਾਨੇ ਜੋ ਸਰਦਰੀ ਰਬ ਦੀ ਕਿਰਪਾ ਦੁਸਤ ਕਰਕੇ ਇਸ ਪਰਮੇਸ਼ਰ ਦਾ ਵਿਚਾਰਨ ਕਰਕੇ ਸਿੱਖੇ ਦਾਹੀ ਦੱਸਦੇ ਹਨ ਗਾਵੀਏ ਸੁਣੀਏ ਮੰਨ ਰੱਖੀਏ ਭਾਗ ਸਤਿਗੁਰੂ ਸਾਹਿਬ ਦੀ ਗਾਦੀਏ ਗਾਉਂਦੇ ਹੈ ਜਦੋਂ ਉਸ ਜਿਹੜਾ ਹੈ ਇੱਕ ਤਾਂ ਇੱਕ ਉਹ ਹੈ ਕਿ ਰੂਪੀ ਹੈ ਉਹਦੇ ਕਾਟ ਕਰੀਏ ਮਰਨੇ ਦਾ ਨਾ ਸਰਵਣ ਦਾ ਸ੍ਰੀਤ ਹੈ ਅਤੇ ਫਿਰ ਬਾਕੀ ਇੱਕ ਸਰਵਣ ਬੰਸਿਆ ਖਰਕੀਆਂ ਕਰਕੇ ਕੀ ਇਹਦਾ ਅਧਿਆਸਾ ਦੇ ਕੇ ਇਸੇ ਪ੍ਰਕਾਰ ਇੱਕ ਕਰਮਵਿਸਹਾਰ ਦੇ ਇਸ ਪ੍ਰਕਾਰ ਨੂੰ ਸ਼ੁਰੂ ਕਰਨਾ ਉਸੇ ਨੂੰ ਸਮਾਪਤ ਕਰਨਾ ਜਿਹਨੇ ਆਜ ਸੱਚ ਜੁਗਾਂਦ ਸੱਚ ਹੈ ਨਾਨਕ ਹੋਸੀ ਸੱਚ ਉਹ ਜਿਸ ਤੋਂ ਸ਼ੁਰੂ ਕੀਤਾ ਉਸੇ ਨੂੰ ਸੰਪੂਰਨ ਕੀਤਾ ਜਾਂ ਕਹੀਏ ਆਜ ਸੱਚ ਕੇ ਉਹ ਨਾਨਕ ਹੋਸੀ ਕੀ ਸੱਚ ਹੈ ਇਹ ਕਰਮਵਿਸਹਾਰ ਹੈ ਇਸੇ ਪ੍ਰਕਾਰ ਅਕੂਰ ਹੈ ਧਾਈਏ ਗੁਰੂ ਦੇ ਗਿਆਨ ਨਾਲ ਹੋਏ Guru sahib de bagair gyan di prapti kinne koi jatan kar lawe. Chahe ved padh le, shastra padh le, jonde da pranishthi di prapti honi hai, eh apurvta hai. Isre prakar, kal sanghe ji halad sanghe gyan di prapti honi, halad koi is prakar khad, jehde hamge eh sariyan chijyan hondiyan, ane balav di arthvad aad ek eh des prakar khad prakar da jehde ਇਹ ਦਿਨਾਂ ਦਿਨਾਂ ਨੇ ਉਹਦਾ ਨਾਂ ਨੇ ਗਾਇਆ ਸੁਣਿਆ ਇਸ ਪ੍ਰਕਾਰ ਖੜਪੜੰਗ ਯਾ ਲਿੰਗਾਂਦਾਰਾ ਇਸ ਤਰ੍ਹਾਂ ਸਾਵਧਨ ਕਰਨਾ ਅਗੇ ਫੇਰ ਕਿਹਾ ਹੈ ਸਗਲ ਬਨਸਪੇ ਜਿਹੜਾ ਸੰਤਰੀ ਸਗਲ ਜੀਵਨ ਨੇ ਕੀਆ ਉੱਚੀ ਰਿਕਨ ਜੇਰ ਸਮਾਣੀ ਖੜਖੜ ਮਹਿਦੋਗੀ ਆ ਇਸ ਪ੍ਰਕਾਰ ਜਾਂ ਕੋ ਤੀਤਰ ਹੈ ਅੰਤਰਾ ਜੈਸੇ ਪਸਾਸੇ ਮੇਰਾ ਜੋ ਜੁਤੀਆ ਕੋ ਮਨ ਵਿੱਚ ਆਰਾ ਕਲਕੰਕੂ ਜਾਂ ਵੇਦਚਾਰ ਜੁਤੀਆ ਕੋ ਨਹੀਂ ਸਕੀ ਆਪ ਕੋ ਵਾਕਾਂ ਦਾਰ ਇਹ ਕਰਨਾ ਉਸ ਇਸ ਪ੍ਰਕਾਰ ਸੇ ਰੱਖੀ ਇਹਨਾਂ ਕਰਨਾ ਹੈ ਨਿਯਾਸਨ ਕਰਨਾ ਜਿਆਤੀ ਜੁਤੀਆ ਪ੍ਰਵਾਹ ਗਿਆਨ ਦੀ ਪ੍ਰਾਪਤੀ ਹੋਏਗੀ ਨੇ ਜੁਤੀਆ ਸਰਸੰਕੋਸ਼ ਦੇ ਆ ਕਰਨਾ ਇਹਦੇ ਉਹਨਾਂ ਗੁਣਾਂ ਦੇ ਅੰਦਰ ਪ੍ਰਵਾਹ ਪਾਏ ਜਾਣਾ ਜੇ ਜਿਆਤੀ ਜੁਤੀਆ ਜਿਹੜੀਆਂ ਕਾਣ ਕੋ ਦਾ ਗਿਆਨ ਵਾਲੀ ਨੇ ਉਹ ਸਿਰ ਸਾਲ ਕਰਕੇ ਨਿਵਾਜ਼ਰੀ ਕਰ ਦੇਣੀ ਤ੍ਰੀ ਜਾਨੀ ਜੁਤੀ ਜਾਂਦੀ ਹੋਈ ਨੇ ਕੌਣ ਵੀ ਆਦ ਕਹੇ ਸੁਭਾਨ ਵੀ ਕਦੇ ਰੋਕ ਨਾ ਸਕਣਾ ਐਸਾ ਪ੍ਰਵਾਹ ਜਿਹਦੇ ਅੰਦਰ ਕਹਿ ਜਾਣਾ ਸਿਆਪੀ ਬੁੱਤੀ ਦਾ ਇਹ ਵਿਆਪੀ ਬੁੱਤੀ ਕੋ ਸਕਾਰ ਇਸ ਪ੍ਰਕਾਰ ਜਿਹੜਾ ਵਿਆਪਨ ਹੈ ਇਹਨਾਂ ਦੇ ਲੱਖਾਂ ਜਣੀਆਂ ਪੌੜੀਆਂ ਵਿਚ ਵੀ ਆਉਣਗੇ ਮਾਰੇ ਸਾਥ ਕਸ਼ਮ ਕਰਨਗੇ ਇਸ ਪ੍ਰਕਾਰ ਸਾਥ ਸੰਭਾਲੀ ਰੱਖੀਏ ਜੇ ਕਰੀਏ ਫਿਰ ਉਸ ਪਰਮੇਸ਼ਰ ਦਾ ਭਾਇ ਪ੍ਰਕਾਸ਼ ਗਿਆਨ ਦਾ ਹੁੰਦਾ ਹੈ ਦੁੱਖ ਪਰਹਰ ਸੋਹ ਘਰ ਲੈ ਜਾ। ਦੂਰ ਫਲਤੀ ਪਿਆਰ ਸੁਣਦੇ ਕਹਿੰਦੇ ਕਾਈ ਦੁੱਖ ਪਰਹਰ। ਦੁੱਖ ਜਿੰਨੇ ਜੰਮਣ ਮਰਦੇ ਸਾਰੇ ਪਰਹਰਨ ਹੋ ਜਾਂਦੇ ਆ। ਨਾਸ ਹੋ ਜਾਂਦੇ ਦੂਰ ਕੇ ਲੈ ਹੋ ਜਾਂਦੀ ਹੈ। ਸੋਹ ਸ਼੍ਰੀਪੋ ਸੂਰਿਆ ਦਾ ਵੀ ਘਰ ਲਿੱਤੀ ਜਾ ਕੇ ਇਸ਼ਟ ਹੋ ਜਾਂਦਾ ਹੈ। ਐਸਾ ਸ਼੍ਰੀਕ੍ਰਿਪੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਦੁੱਖ ਦੀ ਨੀਂਦੀ ਦਰਮਾਨੰਦੀ ਪ੍ਰਾਪਤੀ ਪ੍ਰਾਪਤ ਹੋ ਜਾਂਦਾ ਹੈ ਉਹ ਸੁਖ ਰੂਪੀ ਕਰੀਆ ਕੇ ਦਕੀਨ ਹੋ ਜਾਂਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਅਜਿਹਾ ਗੁਰਮੁਖ ਮਾਰਾ ਗਿਆਨ ਦੀ ਪ੍ਰਾਪਤੀ ਆਏ ਕਰਦੇ ਐ ਫਰਮਾਉਂਦੇ ਹਨ ਗੁਰਮੁਖ ਨਾਦੰ ਗੁਰਮੁਖ ਵੇਦੰ ਅਧਿਕਾਰੀ ਉਹ ਗੁਰਮੁਖ ਜਿਹੜੇ ਜਾਂਦਾ ਨਾਦ ਕੀਰਤਨ ਕਰਦੇ ਰਹਿੰਦੇ ਮੰਨੂ ਬਸ ਕਰਨ ਆ ਕੇ ਟਿਕਾਣੇ ਆਸਤੇ ਹਰ ਉਹ ਨਾਦ ਕੀਰਤਨ ਕਰਦੇ ਰਹਿੰਦੇ ਐ ਜਦੋਂ ਸਭ ਕੁਝ ਕੀਤਨ ਕਰਨ ਵਾਲੇ ਮਨ ਥੱਕ ਜਾਵੇ ਉਦੋਂ ਗੁਰਮੁਖ ਵੇਦਨ ਗੁਰਮੁਖ ਵੇਦ ਵਿਚਾਰ ਕਰਦੇ ਰਹਿੰਦੇ ਰੇਖੇ ਦੇ ਨਿਰਣਾ ਕਰਦੇ ਰਹਿੰਦੇ ਧਿਆਨ ਦੀ ਗੁਰਮੁਖ ਇਹ ਤਿੰਨ ਹਾਲਤਾਂ ਜਿਹੜਾ ਹਰ ਵਕ ਮਨ ਨੇ ਅਨਵਸ਼ ਕੀਤਾ ਗੁਰਮੁਖ ਨੇ ਕਹੇ ਸਰੂਪ ਗਾਇ ਗੀਤ ਗਾਇਆ ਕਹੇ ਸ਼ੂਬ ਲਾਵਾ ਜਾਂ ਸਰੂਪ ਦੇ ਧਿਆਨ ਚ ਲਾਈ ਰੱਖਣਾ ਜਿਉਂ ਉਸ ਦੇ ਗੁੰਦੇ ਰਹਣਾ ਇਸ ਪ੍ਰਕਾਰ ਗੁਰਮਖੰਡ ਆਪਣੇ ਮਨ ਨੂੰ ਵਸ ਕੀਤਾ ਹੈ ਗੁਰਮਖੰਡ ਮਾਨਸ ਪਰਮੇਸ਼ਰਿ ਸਮਾਇ ਰਹਦਾ ਹੈ ਹਰ ਵਕ ਮਿਲਿਆ ਰਹਿੰਦਾ ਹੈ ਇਸ ਪ੍ਰਕਾਰ ਕਰਦੇ ਜੋੜ ਕੇ ਵਾਹਿਗੁਰੂ ਸਮਾਏ ਰਹਿੰਦੇ ਹੈ ਉਹ ਐਸੇ ਗੁਰਮਖੰਡ ਆਦੇ ਜੀ ਗੁਰੂ ਸਾਹਿਬੇ ਮੁਖੰਗਦਨ ਆਦਿ ਕਹਦੇ ਕਿਥੇ ਸੁਣਾ ਕੀਤਾ ਤਾਂ ਗੁਰਮਖ ਅਧਾਰ ਹੀ ਨਹੀਂ ਦੇ ਵਿਚਾਰ ਕੀਤੀ ਉਸਰੀ ਫਿਰ ਮੁਖੀ ਗੁਰੂ ਜੀ ਬ੍ਰਹਮ ਹੈ ਉਹ ਦੇਖੇ ਸਿੱਖਾ ਮਨੁੱਖਾਈ ਸਮਾਇਆ ਹੁੰਦਾ ਆਉਂਦਾ ਆਪੇ ਇਹ ਹੋ ਜਾਂਦਾ ਇਸ ਪ੍ਰਕਾਰ ਏਕਤਾ ਪਾ ਲੈਂਦੇ ਹਨ ਪਹਿਲਾ ਗੁਰਮੁਖ ਗੁਰੂ ਸਾਹਿਬ ਮੁਖੀ ਹਨ ਅਤੇ ਦੂਸਰਾ ਗੁਰਮੁਖ ਅਧਿਕਾਰੀ ਦਾ ਨਾਮ ਹੋ ਤੀਜਾ ਗੁਰਮੁਖ ਪਰਮੇਸ਼ਰ ਦਾ ਨਾਮ ਹੈ ਗੁਰੂ ਸਾਹਿਬ ਦੇ ਮੁਖੋਂ ਜਦੋਂ ਨਾਮ ਸਾਹਿਬ ਸੁਣਿਆ ਤੇ ਗੁਰਮੁਖ ਨੇ ਉਹਦੀ ਦੇਦ ਵਿਚਾਰ ਕੀਤੀ ਅਧਿਕਾਰੀ ਨੇ ਤੇ ਮੁਖੀ ਗੁਰੂ ਪਰਮੇਸ਼ਰ ਦੇ ਕੁਮਾਰ ਨਾ ਤੇ ਬ੍ਰਹਮਾ ਕਰਕੇ ਵੀ ਗੁਰੂ ਪੂਜਨੇਯ ਹਨ ਪਾਰਵਤੀ ਮਾਈ ਕਰਕੇ ਵੀ ਪੂਜਨੇਯ ਹੋ ਗਏ ਮਾਇਆ ਲਖੀ ਕਰਕੇ ਵੀ ਗੁਰੂ ਪੂਜਨੇਯ ਹੋ ਗਏ ਈਸ਼ਰਤੀ ਕਰਕੇ ਵੀ ਗੁਰੂ ਪੂਜਨੇਯ ਹੋ ਗਏ ਉਹ ਸਾਰਿਆਂ ਦੇ ਪੂਜਨੇਯ ਸਤਗੁਰੂ ਹੈ ਇਹ ਸਰਦਰੀ ਵਾਲਾ ਸਾਹਿਬ ਹੋਰ ਲਖੰਧਾਂ ਤੋਂ ਹੋ ਗਈ ਉਹ ਕਹਿੰਦੀ ਹੁ ਜੀ ਇਸ ਵੀ ਹੈ ਸਿੱਖਾ ਕੇ ਹੈ ਇਸ ਪ੍ਰਕਾਰ ਸਿੱਖਾਂ ਦੇ ਵਿਕਾਰ ਨਾਸ਼ ਕਰਦੇ ਹਨ ਗੁਰੂ ਸਾਹਿਬ ਇਹ ਸ਼ਿਵਾਂ ਦੀ ਨਹੀਂ ਹਨ ਗੋਰ ਗੋਰਖ ਬਰਮਾ ਗੁਰ ਅੱਗੇ ਫਿਰ ਗੁਰੂ ਸਾਹਿਬ ਦੋ ਪ੍ਰਸ਼ਨ ਰੱਖਿਆ ਕਰਨ ਆਇਆ ਜੋ ਵਿਸ਼ਨੂੰ ਭਗਵਾਨ ਦਾ ਗੋਰਖ ਸ਼ਬਦ ਸਮਝਣਾ ਬਿਖੋ ਦੀ ਗੇ ਤਾਲਣਾ ਕਰਦੇ ਆ ਹੈ ਜਨ ਦੀ ਤਾਲਣਾ ਸਿੱਖ ਦੀ ਮਹਾਰਾਜ ਕਰਦੇ ਹਨ ਬਰਮ ਗੁਰ ਤੇ ਕਰਦੇ ਹਨ ਜਿਸ ਪ੍ਰਕਾਰ ਨਿਸ਼ਕੇ ਡੋਲ ਸੀ ਜਿਸ ਵੇਲੇ ਕਾਰਵਤੀ ਇਹਨੇ ਜਨਮ ਤੇ ਸਥੀ ਸੀ ਉਸ ਹਿਮਾਲੇ ਘਰ ਵਿੱਚ ਜਾ ਕੇ ਜਨਮ ਘੜਿਆ ਉਹਦੀ ਮਾਤਾ ਦਾ ਨਾਮ ਆਦੰਤੀ ਸੀ ਇਹਨੇ ਦੇ ਘਰ ਜੰਮ ਕੇ ਕੱਟ ਕਰਨ ਲੱਗੀ ਕਿ ਸ਼ਿਵ ਜੀ ਨੂੰ ਮੈਂ ਵਰਨਾ ਹੈ ਕੱਟਦੀ ਦੀ ਪ੍ਰੀਖਿਆ ਤੇ ਮੈਨੂੰ ਕਿ ਤੇ ਕੀ ਕਰਨਾ ਭੰਗ ਭੂਰਾ ਖਾ ਲੈਣਾ ਉਹਦਾ ਹੈ ਤਾਰੇ ਨੇ ਆਉਂਦਾ ਮੈਂ ਦੱਸਿਆ ਸੀ ਰਮੈਨ ਕਿਤੋਂ ਆਉਂਦੀਆਂ ਜਨਮ ਜਨਮ ਕੀ ਰਜ ਹੁਮਾਰੀ ਗਰੋ ਸੰਭ ਨਕਰੋ ਕੁਮਾਰੀ ਉੰਝ ਮੇਰੀ ਜਨਮ ਜਨਮਾਂ ਦੀ ਸ਼ਿਵਜੀ ਦੀ ਭਰਤੀ ਨਾ ਰਗੜ ਲੱਗੀ ਹੋਈ ਹੈ ਇਹ ਵਰੂ ਕੀ ਤਾਂ ਸ਼ਿਵਜੀ ਨੂੰ ਵਰੂ ਆ ਨਿਸ਼ਚੈ ਸੀ ਸ਼ਿਵਾਨੇ ਨਾਲ ਸ਼ਾਦੀ ਕਰਾਉਣ ਦਾ ਦੇ ਸਕੇ ਇਹ ਵਾਹੀ ਦੇ ਮਿਲਣ ਤੋਂ ਬਿਨਾਂ ਹੋਰ ਕਿਸੇ ਪਾਸੇ ਦਾ ਨਿਸ਼ਚੈ ਨਹੀਂ ਰੱਖਣਾ ਕਿਉਂ ਗੁਰੂ ਸਾਹਿਬ ਜੀ ਕਾਰਕ੍ਰਿ ਵੀ ਨਹੀਂ ਹਨ ਮਾ ਆਇਆ ਜਿਹੜੀ ਹੈ ਲਕਸ਼ਮੀ ਇਹ ਪਦਾਰਥ ਜੁੰਦੀ ਆ ਲੋਕਾਂ ਦੇ ਤਾਂ ਹੀ ਕਿਉਂ ਮਾਰੇ ਧਰਮ ਵਿੱਚ ਕੰਮ ਹੋਹ ਪਦਾਰਥ ਬਸਲੇ ਨਾਇਆ ਵੀ ਨਹੀਂ ਹਨ ਕੋ ਹੈ ਵਰਾਂ ਦੀ ਦਾਤੀ ਹੈ ਗੁਰੂ ਸਾਹਿਬ ਬ੍ਰੰਧ ਗਿਆ ਦੇ ਦਾਤ ਦੇਣ ਵਾਲੇ ਹੈ ਇਸ ਕਰਕੇ ਸ੍ਰਸ਼ਟੀ ਵੀ ਨਹੀਂ ਵੀ ਹਨ ਇਹ ਗੌਣੀ ਅਰਥ ਮੰਗੇ ਗੁਣ ਵਿੱਚੋਂ ਲਏ ਕਰਕੇ ਅਰਥ ਕੀਤੇ ਹਨ ਉਹਨੂੰ ਗੁਰੂ ਸਾਹਿਬ ਨਰਨਾ ਦੇ ਵਿਹਿੰਦੇ ਸਿੰਘ ਜੀ ਦੇ ਸਾਰੀਆਂ ਸ਼ਕਤੀਆਂ ਦੇ ਆਗੁਰੂ ਪਰਮੇਸ਼ਰ ਹੈ ਇਹ ਹੋ ਜਾਣਾ ਆਖਾ ਨਹੀਂ ਇਹ ਨੂੰ ਸਿੰਘ ਨੂੰ ਆਪਣੇ ਸੁਧ ਸ਼੍ਰੀਪ ਕਰਕੇ ਜਾਣਦੇ ਹਨ ਤੇ ਕਿਹਾ ਨਹੀਂ ਜਾ ਸਕਦਾ ਸੰਤੀ ਦਿੱਤੀ ਕਿਸੇ ਪ੍ਰਕਾਰ ਕੋਈ ਯੋਜਨਾ ਜੋੜ ਕਰਕੇ ਇਸ ਪ੍ਰਕਾਰ ਕਿਸੇ ਬੱਦੇ ਅਰਥ ਕਰਕੇ ਸਮਝਿਆ ਜਾਵੇ ਜਿਹੜਾ ਉਹ ਸੰਕੀਪਿਤੀ ਕਰਕੇ ਸਰਕਾਰ ਹੁੰਦਾ ਹੈ ਇਹ ਲਖਾਂ ਮਰਤੀ ਜਾਰੇ ਬ੍ਰਹਮਾ ਕਿਸੇ ਤਰ੍ਹਾਂ ਕਥਨ ਕਰਕੇ ਕਿਹਾ ਨਹੀਂ ਜਾਂਦਾ ਗੁਰਾ ਇੱਕ ਦੇਹ ਬੁਝਾਈ ਕੋਈ ਲਖਾਂ ਮਰਤੀ ਜਾਰੇ ਸਮਝੇਦਾ ਜਾਣਣਾ ਅਖੰਡ ਕੀ ਜੰਗ ਦੇਹ ਹੈ ਉਹ ਪ੍ਰਕਾ ਕਰਕੇ ਬਿਆਖੀ ਹੈ ਕੁੰਜਾ ਕੀ ਸਿੱਖਿਆ ਦਿਆਰਾ ਕਦਲਾਂ ਦੀਆਂ ਕਾ ਇੱਕ ਦਾਤਾ ਸਿਖਿਆ ਸਰਗਣ ਦੇ ਸਿੱਖ ਸਾਰਿਆਂ ਦੀਆਂ ਲਈ ਇੱਕ ਜੋ ਦਾਤਾ ਉਹ ਤੂੰ ਦੇਣਾ ਰੂਪ ਹੈ ਹੋ ਮੈਂ ਵਿਸਰ ਨਾ ਜਾ ਮੇਰਾ ਆਪਣਾ ਆਤਮਾ ਰੂਪ ਹੈ ਸਹ ਕਿੰਦੇ ਹਨ ਮਾੜਾ ਇੱਕ ਕਦੇ ਭੁੱਲ ਜਾਂਦਾ ਨੇ ਕਦੇ ਆਪਣਾ ਆਪ ਨਹੀਂ ਕਦੇ ਕਾਈ ਭੁੱਲ ਜਾਂਦਾ ਉਹ ਕਦੇ ਵਿਸਰਨ ਵਾਲਾ ਰੂਪ ਨਹੀਂ ਇਹੋ ਜਿਹਾ ਰੂਪ ਹੈ ਸੇਖੋ ਕਦੇ ਵਿਸਰਨ ਵਾਲਾ ਨਹੀਂ ਐਸਾ ਰੂਪ ਹੈ ਪਰਮੇਸ਼ਰ ਦਾ ਕਦੇ ਸਾਨੂੰ ਆਪਣਾ ਆਪ ਭੁੱਲ ਨਹੀਂ ਜਾਂਦਾ ਆਰਸ਼ੀਕ ਤੁਕਾਂ ਦੇ ਹੋਈ ਹਨ ਅਨਵੇਂ ਇਸ ਪ੍ਰਕਾਰ ਨਾਮ ਨੂੰ ਗਾਵਿਆ ਗੁਣ ਨਿਵਾਰ ਉਹਨਾਂ ਦੇ ਖਜਾਨੇ ਗੁਰੂ ਸਾਹਿਬ ਗਾਉਂਦੇ ਪ੍ਰਕਾਸ਼ ਹੁੰਦਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਥਾਪਿਆ ਨਾ ਜਾਏ ਕੀਤਨ ਹੋਏ ਉਸ ਰੂਪੇ ਦਾ ਵਿਸ਼ਾ ਥਾਪਿਆ ਨਹੀਂ ਜਾਂਦਾ ਕਿਸੇ ਪ੍ਰਕਾਰ ਸਾਧਨ ਕਰਕੇ ਸੁਧ ਨਹੀਂ ਹੋ ਸਕਦਾ ਆਪਣੇ ਆਪ ਰੂਪ ਨੂੰ ਇਹਨੇ ਜਿਵੇਂ ਗੁਰਾਂਵਾਰਾ ਉਹਦਾ ਸਰਵਣ ਮੰਨਣ ਦੀ ਯਤਨ ਕਰਨ ਲਈ ਤੇਰੇ ਸਿੱਖਾਂ ਨੇ ਉਹਦੇ ਮਾਣ ਗਿਆਨ ਨੂੰ ਪਾਇਆ ਹੈ ਅਤੇ ਗੁਰਾਂ ਨਾਲ ਕਰਕੇ ਸਾਰੇ ਦੁੱਖਾਂ ਗੁਰੂ ਸਾਹਿਬ ਦੀ ਜੋ ਮੁਖਵਾੜਾ ਜਿਹੜਾ ਬਚਨ ਨਿਕਣੇ ਹੋ ਇਹ ਕੋਈ ਸ਼ਬਦ ਹੈ ਜਿਸ ਵੀ ਨੂੰ ਵਿਚਾਰਿਆ ਉਹ ਮੁਖੀ ਪਰਮੇਸ਼ਰ ਤੋਂ ਮਿਲਿਆ ਰਹਿੰਦਾ ਹੈ ਗੁਰੂ ਮਾਰਾ ਸਾਥ ਨਾ ਦੇਖਿਆ ਨਹੀਂ ਆਈ ਗੁਨਾ ਦੇ ਸਹਾਈ ਤਨ ਕੇ ਦੀ ਨਹੀਂ ਇਹ ਸੋ ਆਪਣੀ ਸ੍ਰੀਕਣੀ ਜਾਣੇ ਕਸ਼ਮ ਨਹੀਂ ਕਰਦੇ ਕਸ਼ਮ ਕਰਕੇ ਕਿਹਾ ਨਹੀਂ ਜਾਂਦਾ ਇਹ ਗੁਰਾਂ ਨੇ ਸਾਨੂੰ ਸਿੱਖਿਆ ਉਹ ਹੱਤੀ ਹੈ ਕਿ ਸਾਰਿਆਂ ਦੇ ਲਈ ਕੋਈ ਬਾਇਕ ਨਹੀਂ ਹੈ ਉਹ ਕਦੇ ਥੋਲਣਾ ਜਾਵੇ ਸਾਨੂੰ